ਕਾ ਬਲ ਨਹੀਂ ਇਸ ਹਾਤ ਕਰਮ ਕੋ ਨਾਤ ਇਸ ਕਾ ਬਲ ਨਹੀਂ ਤੇ ਅਲੱਗ ਹੁੰਦਾ ਇਸ ਕੋਲੋਂ ਤਲੱਪੇ ਤੋਂ ਇਹ ਜੀਵ ਹੈ ਇਹ ਦੀ ਤਾਕਤ ਹੱਥ ਦੀ ਜਿਹੜੀ ਇਹ ਸ਼ਕਤੀ ਦਿੱਤੀ ਵੀ ਹੈ ਰੂਹ ਜੀ ਦੀ ਸ਼ਕਤੀ ਉਹ ਵੀ ਇਹਦੇ ਹੱਥ ਦੀ ਹੈ ਇਸ ਬਲ ਨਹੀਂ ਇਸ ਹਾਤ ਇਹ ਦੀ ਗੁੱਤ ਇਹਦਾ ਇਹਦਾ ਹੈ ਇਹ ਲੈ ਹੱਥ ਦੀ ਇਹ ਬੁੱਧ ਵਾਲੇ ਦੇ ਹੱਥ ਦੀ ਉਹ ਬਲੀ ਰਾਜਾ ਦਾ ਹੈ ਉਹ ਤਾਜ਼ਾ ਰਾਜਾ ਉਹ ਇਹਦਾ ਜਿਹੜਾ ਬੁੱਧ ਵਾਲਾ ਉਹ ਤੇ ਹੀ ਉਹ ਆਪਣੇ ਪਸੰਦ ਦਾ ਕਰਾ ਲਨ ਕਈ ਵਾਰ ਐਸਾ ਕੰਮ ਕਰਾਉਂਦਾ ਉਹ ਤੇ ਮਨ ਪਿੱਛੇ ਪਸਦਾਉਣਾ ਰਹਿਣਾ ਜੀ ਪਹਿਲਾਂ ਵੀ ਮਨ ਦਰਦਾ ਹੁੰਦਾ ਸੀ ਕੰਮ ਦੀ ਕਰਦੂ ਮਨ ਨੂੰ ਬੁਦੀ ਦੋਇ ਦੱਸਦਾ ਨੇ ਪਰੋਕਰਾਲਾ ਦੇ ਕੇ ਦਲਾਹਾਂ ਰੀ ਗੱਲ ਦੀ ਹੌਸਲਾ ਉਹ ਕਰ ਲੰਦਾ ਤੇ ਬੁਦੀਰ ਮਾਂ ਦੱਸਦੀ ਤੇ ਇਹਨਾਂ ਦਾ ਜਦੋਂ ਵਾਲ ਕੋਲ ਹੁੰਦੇ ਜੋ ਇਹਨਾਂ ਦੇ ਦੱਸਦੇ ਜਦ ਵੀ ਮਨ ਬੁਦੀ ਦੇ ਕੰਮ ਪੁੱਟਾ ਕਰਾਉਂਦਾ ਕਈ ਵਾਰ ਫਿੱਟਾਗਰ ਨਾਲ ਇਹ ਕਰਦੇ ਉਹਦੇ ਜਿਹੜੇ ਕੋਈ ਉਹ ਕਰਨਦਾ ਹੌਸਲਾ ਕਰਕੇ ਆਪਣਾ ਫੈਸਲਾ ਲੈ ਕੇ ਉੱਥੇ ਫੈਲਾਉਂਦਾ ਕਈ ਵਾਰ ਨੁਸਾਨ ਹੋ ਜਾਂਦਾ ਪਰ ਬਰਬਤੀ ਤਾਂ ਉਲਟਾ ਫੈਸਲਾ ਲੈ ਸਾਰੀ ਬਾਤ ਜਿਆਦਾ ਹੌਸਲੇ ਦੇ ਬਿਨਾ ਫੈਸਲਾ ਲਿਆ ਜਾਂਦਾ ਹੌਸਲੇ ਦਾ ਫੇਰ ਉਹਦੇ ਕੋਰੇ ਆ ਉਹ ਕੋਹ ਹਰਵਾਣਿਆ ਉਹ ਹਰਵਾਣੇ ਵਾਲੇ ਕੋਲ ਆ ਹਾਂ ਉਹ ਉਹ ਉਹਦੇ ਕੋਲ ਉਹ ਉਹ ਤਾਂ ਬਲਕੀਰ ਦਾ ਹੁਣ ਲਾ ਬਲੇ ਹੁੰਦਾ ਬਲਕੀਆ ਹੋਟਲ ਹੀ ਵਾਲਾ ਹੈ ਇਹ ਹੌਸਲਾ ਤਾਂ ਇੱਥੇ ਰਿਜ਼ਾ ਬਲਬੀ ਨੇ ਕਬੂਲ ਬਲ ਤੋਂ ਵੀ ਹੌਸਲੇ ਨੇ ਕਬੂਲ ਲੈਣਾ ਹੌਸਲੇ ਦਾ ਹੀ ਨਾਮ ਆਲਾ ਰਬੂਦੀ ਸ਼ਕਤੀ ਹੈ ਸ਼ਕਤੀ ਹੈ ਸਰ ਉਸਾਰੇ ਵਿੱਚ ਅਸਲਾਇਆ ਭਰੋਸਾ ਗਲ ਕਰਾਉ ਨੂੰ ਸਰਬ ਕੋ ਨਾ ਉਹ ਸਰਬ ਕੋ ਪਿੱਛੇ ਇਹ ਨਾਸ ਆ ਦਾ ਸਰਬ ਕੋ ਨਾ ਅੱਜ ਕਿ ਬਣਾ ਦਾ ਸਰਬ ਕੋ ਨਾ ਸਰਜਣਾ ਸਰਬ ਕੋ ਨਾ ਆ ਦਾ ਇਹ ਜਿਹੜਾ ਨਾਸ ਹੈ ਸਰੀਰ ਚ ਇਹ ਵੀ ਉਹਦੇ ਅੰਦਰਿਆ ਫਸਦ ਸਰਬ ਦਾ ਕਲਮ ਸਲਾਮਤ ਹੀ ਜੋ ਪਰਿਵਾਰੀ ਹੋਈ ਹੈ ਨਾ ਸੀਦੀ ਹੈ ਹਾਂਜੀ ਆਗਿਆਕਾਰੀ ਬਪਰਾ ਜੀ ਜੋਤਿਸ਼ ਭਾਵੇਂ ਸੋਈ ਫਿਰਤਿਓ ਐਦਾ ਜੀਓ ਵਿਚਾਰਾ ਆਗਿਆਕਾਰੀ ਉਹ ਆਨਦਾ ਆਪਨ ਇਹ ਚਲਣਾ ਪੈਂਦਾ ਜਿਵੇਂ ਨਾਲ ਜਿਵੇਂ ਉਹ ਡੋਰ ਖਿੱਚਦਾ ਨਾ ਉਹਵੇਂ ਜਾਂਦਾ ਆਗਿਆਕਾਰੀ ਬਪਰਾ ਜੀਓ ਅਵਾ ਸੋਈ ਸੋਈ ਤੁਕਾ ਉਹ ਹੀ ਆਸ ਤਰੇ ਸੋਈ ਸੋਈ ਕੋਸਤੀ ਹੋਇਆ ਉਸਤਾ ਉਹ ਹੀਆ ਜੋ ਉਹ ਹਮ ਲੁਕ ਕੁਛ ਵੀ ਕਰਦਾ ਹੈ ਕਈ ਵਾਰ ਹੋਏ ਤੇ ਇਹ ਜਾਂ ਕਮ ਕਰਾ ਲਦਾ ਉਹ ਜਾਂਦਾ ਚੜੇ ਚੜਦਾ ਜਿਸਦੀ ਮਰਦੀ ਇੱਕ ਕਈ ਵਾਰ ਕਰਦਾ ਤਾਂ ਸਤਾ ਹੀ ਦਿਖਾ ਜਾਂਦਾ ਪਰ ਇਹ ਟੂ ਗ੍ਰਾਡ ਵੀਰ ਨੂੰ ਤੇ ਫੋਨ ਦਾ ਤਦੂਰ ਵੀ ਕਰਾਇਆਗਾ ਕਿ ਮੈਂ ਉਹ ਕਰਦਾ ਮੇਰੀ ਬਰਦੀ ਬਰਦੀ ਵਸਦਾ ਇਹਨਾਂ ਨੂੰ ਭਰੋਸਾ ਫੇਰ ਨਹੀਂ ਆਇਆ ਰੋਕ ਪਰ ਮਰਜੀ ਤੇ ਹੀ ਆਈ ਉਹ ਵਾਲਾ ਮਾਲ ਨਾਲ ਹੈ ਪਰ ਕਹਿੰਦੇ ਵੀ ਮਾਲ ਨਾਲ ਇਹਨੂੰ ਬਚਾਉਣ ਨਾਲ ਸ਼క్తి ਸ਼ਾਲੀ ਬਚਾਉਣ ਨਾਲ ਇਹਨੇ ਬਚਾਇਆ ਮਾਲ ਨਾਲ ਇਹਨੂੰ ਸ਼క్తి ਸੀ ਬਚਾਉਣ ਨਾਲ ਆਸਾਂ ਬਣ ਗਈਆਂ ਬਿਨਾਂ ਲੋਕ ਪਰ ਉਹ ਤੋਂ ਤੋਂ ਮੁੱਤਨੇ ਕਾ ਜੀ ਗੱਲ ਮਿਲ ਜਾਂਦੇ ਰਹਿ। ਤਰੂ ਉੱਚੀ ਧੀ ਜਿਵੇਂ ਬਸਾ ਹੈ ਕਦੋਂ ਸ਼ੋਭ ਹਰ ਕਿਸੰਗ ਲੱਗਦਾ ਹੈ ਕਦੋਂ ਉੱਚੀ ਧੀ ਜਿਵੇਂ ਬਸਾ ਜੀਵਾ ਕਦੇ ਹੰਕਾਰ ਦੀ ਤੇ ਪੈੜੇ ਦੀ ਚਲੇ ਜਾਂਦਾ ਉਹ ਜੋ ਹੋ ਗਿਆ ਹੰਕਾਰ ਚ ਨਹੀਂ ਜੋ ਹੋ ਗਿਆ ਭੈ ਚ ਕਦੇ ਭਾਇਆ ਕਦੇ ਹੌਸਲਾ ਕਦੇ ਜਾੜਾ ਦੇ ਹੋ ਗੁਲਾ ਸੋ ਤਉ ਸੋਗ ਹਰਖ ਸੰਗ ਹਸੈ ਰੰਗ ਹਸੈ ਕਦੋਂ ਖੁਸ਼ੀ ਆ ਗਵੀ ਦੇ ਹਜ਼ਾਰ ਸੋ ਰੰ ਹਰ ਰੰਗੇ ਬਸੈ ਆ ਸੋ ਰੰਗ ਰਸਾ ਸੋ ਦੇ ਕਿਹ ਕਹਦਾ ਸਦੇ ਖੁਸ਼ੀ ਨਾ ਹਸਾ ਤਉ ਮਿੰਦ ਚੰਦ ਵਿਵਹਾਰ ਕਬੂ ਉਂਗ ਆਕਾਸ਼ ਪਿਆਰ ਕਦੋਂ ਦਿਆਲ ਨਰ ਵਿਚ ਲੱਗਿਆ ਹੋਇਆ ਕਦੇ ਦਿੱਕਾ ਕਰਕੇ ਲੱਗਿਆ ਹੋਇਆ ਦਿੱਕਚੰਦ ਜਾਂਦਾ ਆ ਜਿਹਦੇ ਪੌਣਦੇ ਸ਼ੁਕਰੇ ਦੇ ਕੀ ਜਾਂਦਾ ਸਾਰੀ ਮਨ ਭਰੀ ਜਾਂਦਾ ਹੈ ਚਾਹੇ 5 6 ਵੋਲਟੇ ਹੀ ਬਹਿਣ ਤੋਕਰ ਦੇ ਜੋ ਨੂੰ ਬੇਤਾ ਵਰਮ ਵਿਚਾਰ ਨਾ ਨੂੰ ਬੇਤਾ ਵਰਮ ਵਿਚਾਰ ਨਾਨਕ ਆਪ ਬੁਲਾਉਂਦਾ ਹੈ ਬੇਤਾ ਬਣ ਜਾਂਦਾ ਹੈ ਬੇਤਾ ਪਰਪੁਜਾ ਗਿਆਤਾ ਬਣ ਜਾਂਦਾ ਹੈ ਬੇਤਾ ਗਿਆਤਾ ਨੂੰ ਵਰਮ ਵਿਚਾਰ ਦਾ ਬੁਸਰਿਆ ਕੇ ਤੂ ਜਿਆਨੁ ਦਾ ਦੁਦਾਵੀ ਐ ਬਲੀ ਦਾ ਲਾਫ ਬਲਾਵਨ ਹਾਰ ਪਰ ਅਸਲ ਦਾ ਬਲਾਵਨ ਹਾਰ ਪਰ ਬਿਛਰੇ ਮਤਲਬ ਗਿਆਤਾ ਪਰ ਵਿਚਾਰ ਹੈ ਉਹ ਵੀ ਬਲਾਵਨ ਹਾਰ ਦੀ ਵੀ ਜਨ ਮੈਨੂੰ ਜਦੋਂ ਆਪ ਮਿਲੇ ਹੋਏ ਮਰੋੜ ਦੇ ਵੀ ਇਹ ਜਾਣਦਾ ਹੈ ਕਿ ਕਦਸ ਜਗਦਾ ਕੰਮ ਬਹੁਤ ਬਲਾਵਨ ਹਾਰ ਪੰਗਾਇਆ ਤਾਂ ਕੋਈ ਬਣੂਗਾ ਇਸੇ ਤੱਕ ਤਾਂ ਚਾਹੀਦਾ ਹੀ ਹੈ ਉਹਨਾਂ ਅਰੇ ਉਹ